ਜਿੰਦਲੇ ਇਸ ਪਰਵਾਸੀ ਜਿਹੜੇ ਰਹਿ ਗਏ ਭਈ ਪੱਥਰ ਹੀ ਪਰਵੇਸ਼ਰ ਹੈ ਉਹ ਕਾਲੀ ਧਾਰ ਵਿੱਚ ਡੁੱਬ ਗਏ ਭਾਵ ਮੰਜ ਧਾਰ ਵਿੱਚ ਜਿਹੜੀ ਵਿਚਾਲੇ ਜੇ ਹੁੰਦੀ ਹੈ ਜਿੱਥੇ ਬਹੁਤਾ ਪਾਣੀ ਹੋਵੇ ਕਾਲੀ ਧਾਰ ਨੂੰ ਕਹਿੰਦੇ ਨੇ ਜਿੱਥੇ ਬਹੁਤਾ ਪਾਣੀ ਆ ਉਹਦਾ ਰੰਗ ਬਦਲਿਆ ਹੁੰਦਾ ਹੈ ਪਾਣੀ ਦੱਸ ਦਿੰਦਾ ਕਿ ਉੱਥੇ ਪਾਣੀ ਜ਼ਿਆਦਾ ਹੈ ਇਥੋਂ ਪਤਾ ਲੱਗ ਜਾਂਦਾ ਕਬੀਰ ਕਹਿੰਦੇ ਡੁੱਬ ਗਏ ਸਾਰੇ ਤੇ ਇਹਨਾਂ ਪੰਡਿਤ ਲੋਕਾਂ ਨੇ வேத ਸ਼ਾਸਤਰਾਂ ਦਾ ਆਸਰਾ ਲੈ ਕੇ ਜੋ ਦੁਨੀਆ ਨੂੰ ਲੁੱਟਿਆ ਇਹ ਬਹੁਤ ਲੰਬੀ ਕਥਾ ਹੈ ਪਾਹਨ ਬੋੜੀ ਪ੍ਰਥਮੀ ਪੰਡਿਤ ਪਾਰੀ ਬਾਕੇ ਬਾਅਦ ਵਿੱਚ ਲੁੱਟਣਾ ਸ਼ੁਰੂ ਕੀਤਾ ਇਹਨਾਂ ਨੇ ਇਸ ਵਾਸਤੇ ਬੇਦਸ਼ਾਸਤਰਾ ਨੇ ਇਹਨਾਂ ਨੂੰ ਨਹੀਂ ਵਰਜਿਆ ਜਦੋਂ ਵੀ ਵਰਜਿਆ ਕਿਸੇ ਦੇਹਧਾਰੀ ਸਤਿਗੁਰੂ ਨੇ ਵਰਜਿਆ ਤਾਂ ਮੈਂ ਅਰਜ ਕਰ ਰਿਹਾ ਸਾਂ ਇਹਦੇ ਬਾਰੇ ਗੁਰੂ ਅਰਜਨ ਦੇਵ ਜੀ ਦਾ ਵਿਚਾਰ ਦੇਖੀਏ ਗੁਰੂ ਅਰਜਨ ਦੇਵ ਜੀ ਰਾਗ ਮਲਾਰ ਵਿੱਚ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਐਸੇ ਮਲੁਕ ਜਿਹੜੇ ਨੇ ਆਪਣੇ ਸਵਾਮੀ ਗੁਰੂ ਨੂੰ ਛੱਡ ਕੇ ਦੇਹਧਾਰੀ ਸਤਗੁਰੂ ਨੂੰ ਛੱਡ ਕੇ ਤੇ ਜਿਹੜੇ ਹੋਰ ਪੂਜਾ ਕਰਦੇ ਨੇ ਉਹਨਾਂ ਦਾ ਹਾਲ ਕੀ ਐ ਇਹ ਸਤਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਹਿੰਦੇ ਨੇ ਤਿਆਗ ਸੁਆਮੀ ਆਨ ਕੋ ਚਿਤਵਤ ਮੂਡ ਮੁਗਦ ਖਾਲ ਖਰਤੇ ਕਾਗਰ ਨਾਮ ਲੰਦੇ ਕਤ ਉਹ ਜਿਹੜੇ ਬੱਚੇ ਤੇ ਖੇਡ ਸਕਦੇ ਨੇ ਪਰ ਜੇ ਕੋਈ ਆਖੇ ਮੈਂ ਦਰਿਆ ਪਾਰ ਕਰ ਲਵਾ ਕਾਗਜ਼ ਦੀ ਬੇੜੀ ਤੇ ਬਹਿ ਕੇ ਤੇ ਡੁੱਬੇਗਾ ਇਸ ਪ੍ਰਵਾਸੇ ਜੋ ਰਹੇ ਬੁੱਢੇ ਕਾਲੀ ਤਾਰ ਜੇ ਕੋਈ ਆਖੇ ਭਈ ਮੈਂ ਕਾਗਜ਼ ਦੀ ਬੇੜੀ ਤੇ ਪੈਰ ਧਰ ਕੇ ਮੈਂ ਦਰਿਆ ਪਾਰ ਕਰ ਲਵਾ ਮੁਸ਼ਕਲ ਹੈ ਇਹ ਡੁੱਬੇਗਾ ਗੁਰੂ ਅਰਜਨ ਦੇਵ ਕਹਿੰਦੇ ਨੇ ਕਾਗਜ਼ ਦੀਆਂ ਬੇੜੀਆਂ ਨੇ ਸਾਰੀਆਂ ਜਿੰਨੇ ਬੇਦਗਰੰਤ ਸੰਸਾਰ ਵਿੱਚ ਬਣੇ ਨੇ ਕਾਗਰ ਨਾਮ ਲੰਘਾ ਕਤਿ ਸਾਗਰ ਤੁਸੀਂ कागज ਦੀ बेड़ी ਤੇ ਛੜ ਕੇ ਸਮੁੰਦਰ ਕਿਸ ਤਰਾਂ ਪਾਰ ਕਰ ਸਕਦੇ ਹੋ ਬਿਰਥਾ ਕਥਤ ਹਮ ਤਰਤੇ ਇਹ ਝੂਠ ਬੋਲਦੇ ਨੇ ਜਿਹੜੇ ਕਹਿੰਦੇ ਅਸੀਂ तर गए ਆ ਐਵੇਂ ਝੂਠ ਹੈ ਇਹਨਾਂ ਨੂੰ ਪਤਾ ਹੀ ਨਹੀਂ ਭਈ ਤਰਨਾ ਕਿੰਨੂ ਕਹਿੰਦੇ ਨੇ ਮੈਂ ਅਰਜ ਕਰ ਰਿਹਾ ਸਾਂ ਜਦੋਂ ਐਸਾ ਹੋਇਆ ਇੰਨਾ ਕੁਛ ਸਾਡੇ ਗੁਰੂ ਸਾਹਿਬਾਂ ਨੇ ਜੜ ਪੂਜਾ ਤੇ ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਜੋੜਿਆ ਜਾਗਦੀ ਜੋਤ ਨਾਲ ਕਿ ਹਮੇਸ਼ਾ ਜਾਗਦੀ ਜੋਤ ਨੂੰ ਮੰਨੇਗਾ ਮੇਰਾ ਸਿੱਖ ਜੁੜਿਆ ਰਹੇਗਾ ਤੇ ਫਿਰ ਉਹਨਾਂ ਨੇ ਕੀ ਕੀਤਾ ਜ਼ੁਲਮ ਦੇ ਖਿਲਾਫ ਡਟ ਕੇ ਖਲੋਗੇ ਕਈ ਕਰੋੜਾਂ ਸ਼ਹੀਦੀਆਂ ਹੋਈਆਂ ਜ਼ੁਲਮ ਨੂੰ ਮਿਕਾਰ ਕੇ ਰੱਖ ਦਿੱਤਾ ਜ਼ਮਾਨਾ ਬਦਲ ਕੇ ਰੱਖ ਦਿੱਤਾ ਜਿਹੜੇ ਦਰਿਆਵਾਂ ਵਿੱਚੋਂ ਲੰਘ ਕੇ ਬਾਹਰ ਮੁਲਕਾਂ ਤੋਂ ਤੋਂ ਮਾਉਂਦਿਆਂ ਸਰ ਇੱਥੇ ਰਾਜ ਕਰਨ ਵਾਸਤੇ ਉਹ ਦਰੇ ਬੰਦ ਕਰ ਦਿੱਤੇ ਇਹਨਾਂ ਨੇ ਇਹ ਜਾਗਦੀ ਜੋਤ ਦਾ ਇਹ ਕੰਮ ਸੀ ਤੋਂ ਮੈਂ ਅਰਜ ਕਰਾਂ ਜਾਗਦੀ ਜੋਤ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਨੂੰ ਜਸਨੇ ਚੱਲ ਫਿਰ ਕੇ ਚਲਦਿਆਂ ਫਿਰਦਿਆਂ ਪ੍ਰਕਾਸ਼ ਕੀਤਾ ਗੁਰੂ ਨਾਨਕ ਦੀ ਜਾਗਦੀ ਜੋਤ ਨੇ ਬਸਰਾ ਬਗਦਾਦ ਤੇ ਮੱਕੇ ਮਦੀਨੇ ਤੱਕਰ ਪ੍ਰਕਾਸ਼ ਕੀਤਾ ਗੁਰੂ ਨਾਨਕ ਦੀ ਜਾਗਦੀ ਜੋਤ ਨੇ ਕਾਂਸ਼ੀ ਕਲਕੱਤਾ ਤੇ ਲੰਕਾ ਤੱਕਰ ਪ੍ਰਕਾਸ਼ ਕੀਤਾ ਗੁਰੂ ਨਾਨਕ ਦੀ ਜਾਗਦੀ ਜੋਤ ਨੇ ਉੱਤਰ ਤੇ ਦੱਖਣ ਦੇ ਪਹਾੜ ਰੋਸ਼ਨ ਕਰ ਦਿੱਤੇ ਜਿੱਥੇ-ਜਿੱਥੇ ਵੀ ਗਏ ਇਹਨੂੰ ਕਹਿੰਦੇ ਨੇ ਜਾਗਦੀ ਜੋਤ ਗੁਰੂ ਗੋਬਿੰਦ ਸਿੰਘ ਜੀ ਦੀ ਜਾਗਦੀ ਜੋਤ ਨੇ ਉਹਨਾਂ ਨੇ ਆਪਣੇ ਸਿੱਖਾਂ ਨੂੰ ਜਦੋਂ ਕਿਰਪਾ ਕੀਤੀ ਉਹਨਾਂ ਦੇ ਤੇ ਗੁਰਸਿੱਖ ਬਣਾ ਕੇ ਸਪਾਈ ਬਣਾਇਆ ਜ਼ੁਲਮ ਦੇ ਖਿਲਾਫ ਲੜ ਕੇ ਇੱਕ ਨਿਸ਼ਾਨ ਕਾਇਮ ਕਰ ਦਿੱਤਾ ਸਿੱਖ ਰਾਜ ਕਾਇਮ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਅਮਰ ਛਕਾਇਆ ਸੀ ਖਾਲਸਾ ਪੰਥ ਦੀ ਰਚਨਾ ਕੀਤੀ 1799 ਵਿੱਚ ਮਈ ਦੇ ਮਹੀਨੇ ਵਿੱਚ ਲਾਹੌਰ ਦੇ ਕਿਲੇ ਦੇ ਉੱਤੇ ਸਿੱਖ ਰਾਜ ਦਾ ਝੰਡਾ ਚੜ੍ਹ ਗਿਆ ਸੀ ਸਿੱਖ ਫੌਜਾਂ ਦਾ ਸਿੱਖ ਰਾਜ ਕਾਇਮ ਹੋ ਗਿਆ ਇਹ ਕਿਰਪਾ ਕੀਤੀ ਜਾਗਦੀ ਜੋਤ ਨੇ ਹੋਇਆ ਕਿ ਅਗਲੇ ਦਿਨ ਬਹੁਤ ਵੱਡਾ ਇੱਕ ਦਰਬਾਰ ਹੋਇਆ ਜਿਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵੱਡਾ ਕੱਠ ਕਰਕੇ ਤੇ ਬਾਰਾ ਮਿਸਲਾ ਤੋੜ ਕੇ ਤੇ ਸਿੱਖ ਰਾਜ ਕਾਇਮ ਕੀਤਾ ਤੇ ਮਹਾਰਾਜਾ ਪਦਵੀ ਹਾਸਲ ਕੀਤੀ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ ਰਾਜਵਾਸ ਤੇ ਸਾਰੀ ਕਲ ਸੀ ਕਿ ਰਾਜ ਸਾਡਾ ਚਾਹੀਦਾ ਹੋਇਆ ਕਿ ਸਮਾਂ ਬਦਲਦਿਆਂ ਥੇਰ ਨਹੀਂ ਲੱਗਦੀ ਸਮਾਂ ਬਦਲਿਆ ਇਹ ਰਾਜ ਕੇਵਲ 40 ਕੁ ਸਾਲ ਚੱਲ ਸਕਿਆ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਲੋਪ ਹੋ ਗਏ ਜਾ ਕੇ ਤੇ ਇਹਨਾਂ ਨੇ 11ਵੇਂ ਜਾਮੇ ਵਿੱਚ ਗੁਪਤ ਹੋਣ ਦਾ ਪ੍ਰਣ ਕਰ ਲਿਆ ਅਲਾਨ ਕੀਤਾ ਜਦੋਂ 11ਵਾਂ ਜਮਾ गुप्त ਵਰਤਿਆ ਤੇ ਸਿੱਖ ਪੰਥ ਨੂੰ ਕੁਝ ਭਲੇਖੇ ਪੈ ਗਏ ਭਈ ਗੁਰੂ ਤੇ ਹੋ ਹੀ ਨਹੀਂ ਸਕਦਾ ਗੁਰੂ ਤੇ ਹੈ ਹੀ ਨਹੀਂ ਜਿਸ ਜਾਗ ਦੀ ਜੋਤ ਨੇ ਰਾਜ ਕਾਇਮ ਕਰ ਦਿੱਤਾ ਸੀ ਪੰਜਾਬ ਵਿੱਚ ਉਹਨੂੰ ਭੁੱਲ ਗਏ ਸਿੱਖ ਮਰਜ਼ਾਦਾ ਭੁੱਲ ਗਏ ਆਪਣੀ ਆਪਣੀ ਮਰਜ਼ਾਦਾ ਛੱਡ ਕੇ ਕੁਰਤੀਆਂ ਵਿੱਚ ਪੈ ਗਏ ਰਾਜ ਜਾਂਦਾ ਰਿਹਾ ਉਸ ਸਮੇਂ ਵਿੱਚ ਰਾਈਆਂ ਦੀ ਧਰਤੀ ਉੱਤੇ ਜਾਗ ਦੀ ਜੋਤ ਫੇਰ ਆ ਗਈ ਇਸ ਜਾਗਦੀ ਦੀ ਜੋਤ ਨੇ ਫਿਰ ਐਸੀ ਰੋਸ਼ਨੀ ਕੀਤੀ ਕਿ ਜਿੱਥੇ-ਜਿੱਥੇ ਜਾ ਕੇ ਉਪਦੇਸ਼ ਦਿੱਤਾ ਸਭ ਸੰਤ ਬਣਾ ਦਿੱਤੇ ਸਿਪਾਈਆਂ ਨੂੰ ਸੰਤ ਸਿਪਾਈ ਬਣਾਇਆ ਜਿਹੜੇ ਕੇਵਲ ਸਿਪਾਈ ਸਨ ਜਿਹੜੇ ਲੜਨਾ ਜਾਣਦੇ ਸਨ ਉਹਨਾਂ ਸਤਗੁਰੂ ਆਰਮ ਸਿੰਘ ਨੇ ਆਖਿਆ ਹੁਣ ਮੇਰਾ ਸਿੱਖ ਜਿਹੜਾ ਹੋਵੇਗਾ ਉਹ ਸਿਪਾਈ ਵੀ ਹੋਵੇਗਾ ਤੇ ਸੰਤ ਵੀ ਹੋਵੇਗਾ मेरे ਸਿੱਖ ਦਾ ਇੱਕ ਪਾਸਾ ਗਰਮ ਹੋਵੇਗਾ ਇੱਕ ਪਾਸਾ ਠੰਡਾ ਹੋਵੇਗਾ ਤੇ ਉਪਦੇਸ਼ ਦਿੱਤਾ ਸਤਗੁਰਾਂ ਨੇ ਸਤਗੁਰੂ ਰਾਮ ਸਿੰਘ ਜੀ ਨੇ 1914 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤਪਾਨ ਕਰਾ ਕੇ ਸਿਖਾ ਲੂ ਕਿ ਸੰਤ ਖਾਲਸਾ ਦੀ ਰਚਨਾ ਕੀਤੀ ਤੇ ਸ੍ਰੀ ਪੈਣੀ ਸਾਹਿਬ ਤੋਂ ਦ ਅੰਗਰੇਜ਼ ਗਵਰਨਮੈਂਟ ਦੇ ਖਿਲਾਫ ਆਜ਼ਾਦੀ ਦਾ ਬਿਗਲ ਵਾਅਦਾ ਦਿੱਤਾ ਤੇ ਜੋ ਕੁਛ ਸਤਗੁਰੂ ਆਰਮ ਸਿੰਘ ਜੀ ਨੇ ਉਪਦੇਸ਼ ਦਿੱਤਾ ਇਹਨਾਂ ਸ਼ਬਦਾਂ ਵਿੱਚ ਹੈ ਸਿੱਖ ਨੂੰ ਹਲੂਣਿਆ ਤੇ ਆਖਿਆ ਆਹ ਦੀ ਖਾਤਰ ਵਚਨ ਪੁਜਾਰੀ ਤੇ ਮਰਨੋ ਨਾ ਡਰ ਖਾਇਆ ਕਰ ਦੇਸ਼ ਦੀ ਖਾਤਰ ਵਚਨ ਪੁਜਾਰੀ ਮਰਨੋ ਨਾ ਡਰ ਖਾਇਆ ਕਰ ਆਸ ਕਰ ਵਚਨ ਪੁਜਾਰੀ ਮਰ ਨੋ ਨਾ ਦਰਖਾਇਆ ਕਰ ਜੇਸ਼ ਦੀ ਖਾ ਕਰ ਨਾ ਦਰਖਾਇਆ ਕਰ ਜੇਸ਼ ਦੀ ਵਚਨ ਪੁਜਾਰੀ ਮਰ ਨਾ ਦਰਖਾਇਆ ਕਰ ਕਰ ਮਰ ਨੋ ਨਾ ਰਖਾਇਆ ਕਰ ਤੇ ਮਰ ਨੂੰ ਨਾ ਡਰ ਖਾਇਆ ਕਰ ਓ ਜਿ ਦੇਖਿ ਸਿਖਾ ਕਰ ਬਕਲ ਪੁਜਾਰੀ ਮਰ ਨੂੰ ਨਾ ਡਰ ਖਾਇਆ ਕਰ ਜੇ ਸਿਖਾ ਕਰ ਬਕਲ ਪੁਜਾਰੀ ਤਕੀਨਾ ਅਲਾਨ ਕੀਤਾ ਪੰਜਾਬ ਦੀ ਧਰਤੀ ਤੇ ਉਪਦੇਸ਼ ਦਿੱਤਾ ਕਿ ਅੰਗਰੇਜ਼ ਦੇ ਖਿਲਾਫ ਡਟ ਕੇ ਖੜੋ ਜਾ ਪੂਰਨ ਬਾਈਕਾਟ ਕਰ ਦਿੱਤਾ ਅੰਗਰੇਜ਼ ਦਾ ਮੜੀਆਂ ਤੇ ਮਠ ਸਾਰੇ ਢਾ ਤੇ ਪੂਰਨ ਪ੍ਰੇਮ ਪ੍ਰਤੀਤ ਸੱਜਾ ਬ੍ਰਤ ਮੜੀ ਮਠ ਭੂਲ ਨਾ ਮਾਨਾ ਸਤਕਰੂ ਰਾਮ ਸਿੰਘ ਨੇ ਜੋ ਉਪਦੇਸ਼ ਦਿੱਤਾ ਨਾਮ ਤਾਰੀ ਜਿਹੜੇ ਬੜੇ ਉਹਨਾਂ ਸਿੱਖਾਂ ਨੇ ਜਿੱਥੇ ਜਿੱਥੇ ਮੱਠ ਬੜੇ ਸਨ ਮਰਿਆਂ ਤੇ ਥੜੀਆਂ ਦਾ ਸਫਾਇਆ ਕਰ ਦਿੱਤਾ ਸਾਡੇ ਉੱਥੇ ਦਿੱਲੀ ਵਿੱਚ ਹੁੰਦੇ ਸਨ ਗੋਪਾਲ ਸਿੰਘ ਜੀ ਇਹ ਸਨ ਗਲੋਟੀਆਂ ਦੇ ਪਿੱਛੋਂ ਉਹ ਕਹਿੰਦੇ ਹੁੰਦੇ ਸਨ ਮੇਰੇ ਦਾਦਾ ਚਾਰ ਭਰਾ ਸਨ ਜਿਨ੍ਹਾਂ ਦੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਤੇ ਧੌਂਕਲ ਦਾ ਤਲ ਜਾ ਕੇ ਰਾਤ ਰਾਤ ਵੱਢ ਕੇ ਲੈਂਦਾ ਸੀ ਜਿਉ ਚੁੱਕਿਆ ਲਿਆ ਕੇ ਪਹਿਣੀ ਸਾਭ ਰੱਖਿਆ ਜਿਹਦੇ ਥੇਗ ਬੜੇ ਬੜੇ ਸਨ ਟੋਏ ਬੜੇ ਸਨ ਇੱਥੇ ਦਾਲਾ ਜਨ ਵਾਸਤੇ ਇਸ ਤਰ੍ਹਾਂ ਨਾਮਧਾਰੀਆਂ ਨੇ ਮੜੀਆਂ ਤੇ ਮੱਠਾਂ ਦਾ ਢਾਹ ਕੇ ਸਫਾਇਆ ਕੀਤਾ ਹੋਇਆ ਕੀ ਥੋੜੇ ਚਰਬਾ ਦੀ ਸਤਗੁਰੂ ਆਰਾਮ ਸਿੰਘ ਸੱਚੇ ਪਾਤਸ਼ਾਹ ਜਲਾਵਤਲ ਹੋਏ ਜਲਾਵਤਲ ਹੋ ਗਏ ਤੇ ਸਿੱਖਾਂ ਨੂੰ ਫਾਂਸੀਆਂ ਤੇ ਚੜਨਾ ਪਿਆ ਫਾਂਸੀਆਂ ਦੇ ਰਸੇ ਗळा ਵਿੱਚ ਪਾਏ ਤੋਪਾਂ ਨਾਲ ਉੱਡ ਕੇ ਫੀਤੇ ਫੀਤੇ ਤੁੰਬੇ ਤੁੰਬੇ ਉੱਡ ਗਏ ਆਪਣੇ ਦੇਸ਼ ਧਰਮ ਦੀ ਖਾਤਰ ਜਿਹੜਾ ਸਤਕਰੂ ਰਾਮ ਸਿੰਘ ਜੀ ਨੇ ਉਪਦੇਸ਼ ਦਿੱਤਾ ਸੀ ਉਹਦੇ ਤੇ ਪੂਰੇ ਉਤਰ ਕੇ ਵਿਖਾਇਆ ਤੇ ਉਹਨਾਂ ਨੇ ਆਖਿਆ ਸੀ ਸਿੱਖਾਂ ਨੂੰ ਇਹ ਹੀ ਗੱਲ ਆਖੀ ਸੀ ਕਿ ਹਮੇਸ਼ਾ ਜਾਗਦੀ ਜੋਤ ਨਾਲ ਜੁੜ ਕੇ ਰਹਿਣਾ ਹੈ ਇਹ ਚੀਜ਼ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ ਜੋਤ ਜਪੋ ਦਿਨ ਰਾਤ ਜਾਗਤ ਜੋਤ ਜਪੋ जाग सजोत जपा ले सुबह सोर जाग सजोत जपा ले सुबह सोर एक बिना मन ना कि ना आंदे एक बिना मन ना कि ना आंदे देख बिना मन ना कि ना आने एक बिना मन ना ना मन लाग ना ना मैं ये ज्योत जपो जन्म रात जागत ज्योत जपो ज्योत जपो जन्म रात जागत ज्योत जपो ना ना मन लाग ना ना मैं ये ज्योत जपो जन्म रात जागत ज्योत जपो ज्योत जपो जन्म रात जागत ज्योत जपो अर्ज कर रे सा